शलोक महला चौथा बिन सतगुरु सेवा जी के वंदना जीते कर्म कमाहि बिन सतगुरु सेवा खबर ना पावै मर जम्मे आवै जाए बिन सतगुरु जी के वंदन जत्ते करबौ सतगुरु बिना जदे भी इन्हें करब ਨੀ ਦੇ ਜਾਲ ਬਣ ਕੇ ਇਹ ਕਰਮ ਕਰਮ ਜਿੰਨੇ ਕੀਤੇ ਨੇ ਜੀ ਦੇ ਜਾਲ ਨੇ ਜੀ ਕਾੜ ਪਰਿਓਰ ਵੇਦ ਬਚਾ ਲਿਓ ਨੇ ਛੁੱਟ ਕੇ ਅੱਧ ਗੁੱਧ ਵੱਧੇ ਹੋਰ ਵੱਜ ਗਿਆ ਜੀ ਦਾ ਜਾਲ ਬਣ ਕੇ ਸਤਿਗੁਰੂ ਜੀ ਦੀ ਕਰਮ ਕਾਲ ਨੂੰ ਸਭ ਫਸਾਰਦਾ ਕਰਮ ਦੇ ਵਿੱਚ ਉਹਨੇ ਹੋਰ ਜਗਰਤਾ ਆ ਗਿਆ ਮੈਂ ਕੁਝ ਕਰਦਾ ਕਰਦਾ ਕੁਝ ਵੀ ਠੇਕਾ ਹਾਂਜੀ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੀਤੇ ਕਰਮ ਕਮਾਹੇ ਕਰਮ ਕਮਾਏ ਜੀ ਕੇ ਬੰਦਰ ਬਣ ਗਏ ਹੋ ਅੱਛਾ ਜੀ ਜੀਤੋ ਬੰਦਨਾ ਦੇ ਬਾਅਦ ਹੋਰ ਵਜ ਹੋਰ ਵਜ ਠੀਕ ਹੈ ਜੀ ਬਿਨ ਸਤਗੁਰ ਸੇਵੇ ਠਵਰ ਨਾ ਪਾਵੇਈ ਮਰ ਜੰਮ ਆ ਅੰਦੇਖ ਜਨਰਲ ਉਹ ਜ਼ਿਆਦਾ ਖਬਰ ਨਾ ਪਾਵੇ। ਸਾਰਾ ਪਤਾ ਨਹੀਂ ਲੱਗਿਆ ਕਿਹੜੀ ਦਿਸ਼ਾ ਦਾ ਵੀ ਪਤਾ ਲੱਗਿਆ ਤੇ ਕਦੋਂ ਚਾਲੇ ਕਦੋਂ ਸੀ ਹੈ। ਸਮਝ ਨਹੀਂ ਆਈ। ਬਸ ਜਮੇਣਾ ਨਾ ਮਰ ਜਾਂਦਾ। ਜਮਨਪੁਰ ਤੇ ਪਹ ਗਿਆ। ਮਰ ਜਮੇ ਆਵੇ ਜਾਈ। ਠੀਕ ਹੈ ਜੀ। ਆਵੇ ਗਏ ਪਰ ਉਹ ਜੋ ਕੁਝ ਕੀਤਾ ਬੰਸਰੋ ਸੇਵਾ ਤੇ ਉਹਨੇ ਇੱਕ ਬਿਵਾਰੀ ਪੈਦਾ ਕੀਤੀ। ठीक है जी बिन सतगुरु सेवा फिक्का बोलना नाम ना बसता मन आए नानक बिन सतगुरु सेवा जंपुर बद्धे मारियां मुंह काले उठ जाए सतगुरु दी सेवा ते मेनू ਉਨ ਲੈ ਬਿਚ ਨਾਲ ਬਸਣਾ ਨੇ ਜੇ ਲੱਭਣ ਵਿੱਚ ਨਹੀਂ ਹੁੰਦਾ ਪੂਜੀ ਬਣੀ ਉਹ ਮੈਂ ਅੰਦਰੋਂ ਪਾਣਦੇ ਬਸ ਬਾਹਰ ਆਉਂਦੀਆਂ ਜੋ ਪਾਣਦੇ ਜ ਵਸਤੂ ਬਾਹਰ ਹੋ ਜਾਂਦੀ ਮੋਟ ਕਦੋਂ ਆਉ ਕਦੇ ਨਾ ਮੁੱਚ ਬਸ ਤੂੰਗਾ ਨਾਲ ਕੇ ਬੰਦ ਸਦ ਬੰਦੇ ਮਾਰੀਏ ਉਕਾੜੇ ਪੁੱਛ ਜਾਂਦਾ ਆਉ ਜੰਪੁਰ ਬੰਦੇ ਮਾਰੀਏ ਜੰਪੁਰ ਬੰਦੇ ਰਹਿਣਗੇ ਸਾਰ ਬਿਲਦੀ ਰਹੂਗੀ ਉਹ ਕਾਲੇ ਹੋਰ ਜਾਣ ਉਹ ਕਾਲੇ ਰਹਿਣਗੇ ਜੱਬਲਪੁਰ ਤੇ ਪਹਿਰਣ ਪਰਮਜਾਲ ਚ ਫਸੇ ਰਹਿਣਗੇ ਹਾਂਜੀ ਪਰਮਜਾਲ ਚ ਫਸੇ ਰਹਿਣਗੇ ਠੀਕ ਹੈ ਜੀ ਮਹੱਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰਹਿ ਚਾਕਰੀ ਪਰ ਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁੱਲ ਕਾ ਕਰਨ ਉਦਾਰ ਹਾਂ ਇੱਕ ਸਤਗੁਰ ਸੇਵਾ ਕਰੇ ਚਾਕਰੀ ਜਦ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ ਆਖਰੀ ਕਰਦੇ। ਨਾਲ ਨਾਮੇ ਲੱਗੇ ਪਿਆਰ ਨਾਲ ਨਾਮ ਨੂੰ ਪਿਆਰ ਵਿੱਚ ਲੱਗ ਕੇ ਆਖਰੀ ਕਰਦੇ ਨੇ। ਤਾਂ ਤੇਰਾ ਸਵਾਲ ਆਪਣਾ ਰਤਨ ਆਪਣਾ ਜਿਹੜਾ ਸਵਾਲ ਹੈ। ਕੋਲਦਾ ਕਰਿਆ ਉਹਦਾ। ਆਪਣਾ ਜਨਮ ਤੋਂ ਸਵਾਲ ਨਾਲ ਕੋਲਦਾ ਵੀ ਹਜ਼ਾਰ ਕਰ ਦਿੰਦੇ ਨੇ। ਉਹਦੇ ਕੋਲ ਦੇ ਆਹ ਕਿਹੜੀ ਹੈ? ਉਹ ਜਲੀ ਮੁੱਖਾ ਕੋਲ ਹੈ। ਅੱਛਾ ਜੀ। ਜੁੱਖਾ ਕੋਲ ਨਾ ਵੀ ਯਾਰ ਕਰਦੇ ਨੇ ਸੁੱਖਾ ਕੋਲ ਸੁਣ ਲੈਂਦੀ ਐ, ਸਮਝ ਲੈਂਦੀ ਐ, ਫਿੱਟੂ ਲਿਖ ਦਿੰਦੇ ਨੇ। ਬੋਲਦੇ ਨੇ ਉਹ ਹੁੰਦਾ ਰਹੇ ਪਿੱਛੋਂ। ਠੀਕ ਹੈ ਜਨਮ ਪਦਾਰਥ ਪਾ ਲੈਨੇ ਹਾਂ ਜੀ ਨਾਨਕ ਜਨਮ ਸਵਾਰਨ ਆਪਣਾ ਕੁੱਲ ਕਰਨ ਆਧਾਰ। ਹਾਂ। ਫੁਰਕਾ ਕਰਨ ਦਾ। ਜਨਮ ਪਦਾਰਥਾਂ ਬਾਰੇ ਦੱਸ ਦਿੰਦੇ ਨੇ ਹੂੰ ਉਹ ਕੋਈ ਕਹਿ ਗਾ ਰਿਹਾ ਨੁੱਦ ਤੇ ਠੀਕ ਹੈ ਜੀ ਪੌੜੀ ਆਪੇ ਚਾਰ ਸਾਲ ਆਪ ਹੈ ਪੰਦਾ ਆਪੇ ਚਾਟੜੇ ਪੜਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੀ ਆਸਾਲ ਵੀ ਆਪੇ ਪਾਉਂਦਾ ਵੀ ਆਪੇ ਹਿਲਦੇ ਚਾਰ ਸਾਲ ਬਣੀ ਹੋਈ ਹੈ ਪਾਉਂਦਾ ਬੈਠਾ ਹਿਲਦੇ ਚ ਕਿਆ ਕਲਾ ਬਣ ਗਈ ਉਹ ਬੁੱਧੀ ਬੁੱਧੀ ਦੋਇ ਜਾਦੜੇ ਉਹ ਕਾਇਨਾ ਬਾਰ ਵੀ ਪਾਉਂਦਾ ਪਾਉਂਦਾ ਬੈਠਾ ਆਹ ਚਾਰ ਸਾਲ ਦੀ ਕੀ ਲੋੜ ਠੀਕ ਹੈ ਜੀ ਸਤਰੇ ਲੋੜਾ ਜਿੱਦਾਂ ਉੱਧਰ ਪੜਿਆ ਉਦੋਂ ਗੱਲ ਬਣਦੀ ਹੈ ਬਾਹਰ ਪੜੇ ਵੀ ਕੁਝ ਚੱਲ ਬਾਹਰ ਨੇ ਗੱਲ ਵੀ ਉੱਧਰ ਲੈ ਕੇ ਬ੍ਰੇਕ ਕਰ ਦਿੱਤੀ ਆਹ ਲੇ ਦਸਿਆ ਦੁਬਾਰੇ 95 ਵਸਤੂ ਪਹਿਲਾਂ ਬਸ ਪਛਾਣ ਕੇ ਆਪੇ ਆਪੇ ਛਾਟਲੇ ਪਾੜਨ ਨੂੰ ਕੋਆਣੀ ਕੋ ਆਏ ਨਾ ਰੋਏ ਪਰਨ ਨੂੰ ਕੋ ਬਾਣੀ ਠੀਕ ਹੈ ਜੀ ਛਾਟਲੇ ਦੋਏ ਮਜ਼ਬੂਤੀ ਪਰਨ ਨੂੰ ਰੋਏ ਨਾ ਆਏ ਸੌਣ ਨੂੰ ਪਰਨ ਕੋ ਬਾਣੀ ਬਾਣੀ ਬਾੜ ਨੂੰ ਨਾ ਆਏ ਬਾਣੀ ਆ ਉਹ ਕਰਮਾਂ ਵਾਲੇ ਨੂੰ ਕਿਸੇ ਨੂੰ ਹੋਰ ਬਣਨੀ ਮਿਲ ਜਾਂਦੀ ਹੈ ਸਾਲੇ ਨੂੰ ਦੂਜੀ ਮਿਲਦੀ ਹਰ ਕੁਰਬਾਨੀ ਵੀ ਇਹੀ ਕਹਿੰਦੀ ਹੈ ਜਿਦੜਿਆ ਸਾਰੇ ਨਾ ਨ ਦੇ ਪ੍ਰਭ ਕਾ ਨਾਮ ਦੇਹੀ ਬੇਸ ਕਾ ਵੀ ਇਹੀ ਕਹਿੰਦੀ ਹੈ ਆਪੇ ਮਾਤਾ ਆਪੇ ਆਪੇ ਬਾਲਕ ਕਰੇ ਸਿਆਣੀ ਆਪੇ ਬੋਤਾ ਆਪੇ ਪਿਤਾ ਆਪੇ ਬਾਲਕ ਕਰੇ ਸ ਆਪੇ ਬਾਲਕ ਨੂੰ ਸੇਵਾ ਕਰਦਾ ਬਾਲਕਾਂ ਨੂੰ ਮਦਦ ਦੇ ਮਾਤਾ ਪਿਤਾ ਲਾ ਕੰਮ ਹੀ ਉੱਤਦਾ ਗੁਰਦੇਵ माता ਗੁਰਦੇਵ पिता ਇਹ ਫਿਰ ਮੱਤ ਦੇ ਕੇ ਮਨ ਨੂੰ ਸਿਆਣਾ ਕਰਦਾ ਹੈ ਜੀ ਆ ਗੁਰਦੇਵ ਦੀ 40 ਸਾਲ ਹੈ ਠੀਕ ਹੈ ਜੀ ਉਹ 40 ਸਾਲ ਦਾ ਜਲਦੀ ਨਹੀਂ ਪੜ੍ਹ ਉਹਨੇ ਬੜਾ ਕੰਨ ਪੜ੍ਹਿਆ ਠੀਕ ਹੈ ਅਵਿਧਿਆ ਪੜ੍ਹਨੇ ਹੈ ਵਿਧਿਆ ਛੱਡੀ ਹੋਈ ਹੈ ਜੀ ਇਕ ਤਾਂ ਕੋਲ ਗੁਰਦੇ ਸਭ ਆਪੇ ਉਹ ਜੇ ਕਿਤੇ ਫਲਦੇ ਦਫਾਵਾਂ ਦੇਲੇ ਫਲਦੇ ਸਭ ਦੇ ਪੜਾਈ ਦੀ ਸਤਿਗੁਰ ਫਲਦੇ ਤੇ ਤਾਂ ਲੈnde ਕੋਈ ਸਭ ਕੁਝ ਗੁਰਦੇ ਨਾਲੀ ਬਹੁਤੀ ਹੈ ਗੱਲ ਇਥੇ ਕਿਤਾ ਆਪੇ ਕਰੇ ਇਹ ਲਈ ਬਸ ਫਿਰ ਦੂਜੇ ਜਿੱਥੇ ਫਲਦੇ ਨੇ ਜਿੱਥੇ ਫਲਦੇ ਉੱਥੇ ਆਣੇ ਹੋਗੇ ਉਹ ਤੇਰੀ ਕੁੜੀ ਦੀ ਬੈਗੇ ਪੜੋਂ ਤੇ ਆਨੇ ਉਸੇ ਉੱਤੇ ਲੱਜ ਬੈ ਕੇ ਪੜੋਂ ਤੇ ਲੋਕ ਤੇਰੀ ਕੁੜੀ ਦੀ ਬੈਗੇ ਪੜਦੇ ਨੇ ਜਿਹੜੀ ਬੁੜੀਆਂ ਨਾਲ ਪੜਦੇ। ਇਹ ਦਿਮਾਗ ਨਾਲ ਪੜਨ ਵਾਲੀ ਪੜਾਈ ਹੈ ਜੀ। ਠੀਕ ਹੈ ਜੀ। ਇਹ ਦਿਲ ਚੋਂ ਪੜਨ ਵਾਲੀ ਪੜਾਈ ਹੈ। ਅੰਦਰ ਮਹਿਲ ਬੁਲਾਏ। ਜੇ ਆਪ ਤੇਰਾ ਮਨ ਸੱਚੇ ਭਾਣੇ। ਜੋ ਸੱਚੇ ਹੋਵੇ ਤੇਰੀ ਇੱਛਾ ਤੇਰੇ ਅਰਜ਼ਾ ਜੇ ਸਕੇ ਹੋਵੇ ਪੜੇ ਗਏ ਪੂਰੇ ਉਧਰ ਬਹਿਲ ਬੁਲਾ ਲੈ ਉਧਰ ਬੁਲਾ ਉਹ ਵੀ ਤਾਂ ਕਲਾ ਉਧਰ ਬਹਿਲ ਬੁલાਏ ਜੇ ਤੇਰੇ ਸੱਚੇ ਮਨ ਪਾਵੇ ਜੇ ਸਕੇ ਹੋਵੇ ਹੋ ਤੇਰੇ ਕੋਲ ਤੁ ਪਾ ਕੇ ਵੀ ਹੁਣ ਠੀਕ ਹੈ ਉਹਨੂੰ ਕਿਹਾ ਹੁਣ ਤੂੰ ਜੇ ਅੰਦਰ ਆ ਜਾ ਉਹ ਤੇਰੇ ਵੀ ਚੱਲੇ ਆਓ ਠੀਕ ਹੈ ਜੀ ਸਰਦਾਰ ਖੋਲਦੋਏ ਦੇ ਵਾਸਤੇ ਉਹਨੂੰ ਮਾਤੇ ਸਰਦਾਰ ਖੋਲਦੋਏ ਨਾਲ ਕੋਈ ਵੀ ਜੇੜਾਤੀ ਬਾਲ ਨੇ ਪੜਾਈ ਜਿਹੜੀ ਉੱਥੇ ਸਮਝ ਨਹੀਂ ਸੀ ਬਾਲ ਨਹੀਂ ਪੜ੍ਹਲੀ ਸੀ ਉਹ ਤੁਸੀਂ ਹਵਾਲਦਾਰੀ ਨੇ ਪੂਰੀ ਸਮਝ ਲਿਆ ਜੋ ਹੁਣ ਤੁਸੀਂ ਉੱਧਰ ਜਾਓ ਅੰਦਰ ਵਾਲੇ ਪੜਾਈ ਪੜ੍ਹੇ ਜਾਣਾ ਆਪਾਂ ਠੀਕ ਹੈ ਜੀ ਫਿਰ ਸੁਗਾ ਜਿੰਨਾ ਆਪੇ ਗੁਰਮੁਖੀ ਦੇ ਵਡਿਆਈ ਸੇ ਜਨ ਸੱਚੀ ਦਰਗਹ ਜਾਣੇ ਜਿੰਨਾ ਗੁਰਮੁਖਤੇ ਵੜਿਆ ਜਿੰਨਾ ਗੁਰਮੁਖਾਂ ਨੂੰ ਵੜਿਆ ਹੀ ਦਦਾ। ਕਿ ਤੇ ਜਾਣਾ ਹੈ ਸੱਚੀ ਦਰਗਾਹ। ਜਾਣ ਲੈ ਤੇ ਆਪੇ ਜਾਣ ਲੈ ਸੱਚੀ ਦਰਗਾਹ ਨੂੰ। ਅੱਛਾ ਜੀ। ਜਿੰਨੂੰ ਵੜਿਆ ਤੂੰ ਬਖਸ਼ਿਸ਼ ਕਰਦਨ ਹੈ, ਕਿਰਪਾ ਕਰਦਨ ਹੈ ਉਹ ਤੱਕੀ ਦਰਗਾਹ ਨੂੰ ਲੈ ਦੇ। ਉਹ ਅਸਲ ਤੇ ਤਰਕੁਟੀ ਜਿਹੜਾ ਨੇ ਸੱਚੀ ਦਰਗਾਹ ਦਾ ਪਾਠ ਪੜ੍ਹ ਉਹ ਅੰਦਰ ਬਿਠਾ ਲ ਕੇ ਆਪਣੇ ਕੋਲ ਠੀਕ ਹੈ ਜੀ ਉਹ ਲਾਈਨ ਲਿਖਦੇ ਨੇ ਬਹੁਤ ਥੱਲੇ ਜਿਹਨਾਂ ਕੋਲ ਉਹ ਗੱਲ ਕਰਨੀ ਦੀ ਗੱਲ ਕਰ ਨਾਲ ਸੱਚੀ ਦਰਗਾਹ ਆਪੇ ਜਾਣੇ ਆਪੇ ਕਿੱਦੋਂ ਜਾਣੇ ਜਿਹੜਾ ਇਹ ਜਾਣਦੇ ਤੇ ਬੈਠੇ ਤੂੰ ਜਲੂਨ ਵਾਲਾ ਆਪੇ ਕੀ ਗਏ ਜਿਨ੍ਹਾਂ ਆਪੇ ਗੁਰਮੁਖੀ ਦੇ ਵਡਿਆਈ ਤੇ ਜਨ ਸੱਚੀ ਦਰਗਹ ਜਾਣੇ ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ ਜੀ